ਸੰਤ ਦੇ ਦੁੱਖ ਨੂੰ ਤੇ ਮੁਕਤ ਭਵੈ ਸੰਤ ਦੇ ਦੁੱਖਨ ਕਾਗੋ ਲਗਵੈ ਜੇ ਸਤ ਨੂੰ ਕੋਈ ਦੁੱਖ ਦਵੇ ਉਹਦਾ ਮੁਕ ਭਵੈ ਦਾ ਮਤਲਬ ਰਹਾ ਉਹਦਾ ਸੱਚ ਤੋਂ ਹੋ ਸੱਚ ਬੰਦ ਨੂੰ ਪਿੱਠ ਹੋ ਜਾਂਦੀ ਹੈ ਜੇ ਕਿਸੇ ਜੀ ਸੱਚ ਬੰਦੇ ਪਿੱਠ ਹੋ ਜਾ ਫਿਰ ਨਰਕ ਵਾਲੋਂ ਮੂੰਹ ਹੋ ਜਾਂਦਾ ਉਹਨੂੰ ਕੱਜ ਥੁਰਗਾ ਸੁਕਸਾਗਰ ਝਰਕ ਪਾਪਸਾਗਰ ਪਾਪਸਾਗਰ ਵੱਲੋਂ ਉਹ ਐ ਫਿਰ ਗਾਹਾਂ ਹੀ ਗਾਹ ਜਾਂਦਾ ਪਾਪਸਾਗਰ ਦੇ ਤਨੂਏ ਕਿਨਾਰੇ ਤੋਂ ਬਹੁਤ ਦੂਰ ਚੱਲਿਆ ਨਾ ਕਿਨਾਰੇ ਤੇ ਆ ਗਿਆ ਸੀ ਬਹੁਤ ਸਾਦਰ ਦੇ ਨੇੜੇ ਫਿਰ ਵਿਚਾਲੇ ਨੂੰ ਚੱਲਿਆ ਨਾ ਲਹਿਰਾਂ ਨਾ ਹੋਰ ਚੱਪੁਠਾ ਹੋ ਗਿਆ ਕਿਨਾਰੇ ਵੱਲੋਂ ਆਉਂਦਾ ਆਉਂਦਾ ਉਹ ਪਮਾ ਕੇ ਅੰਦਰ ਨੂੰ ਚੱਲਣ ਲੱਗਾ ਸਭ ਪਾਪਸਾਗਰ ਦੇ ਵਿੱਚ ਨੂੰ होते-होते भईयोगा हो जब दुखन के दुखन ते मुख पवे संतन के दुखन काग जो लवे सतन काग जियो लवे काग जियो लवे आ जियो लगा जना ओ कौन हर भक्त कौन है जेडी व्यक्ति है बहुत ही व्याकुल रहना है व्याकुल ਜਿਹਨਾਂ ਕੌਮ ਵਿਆ ਕਰ ਰਹੇ ਸਾਰਾ ਦਿਨ ਕੋਈ ਨਹੀਂ ਕੌ ਕਿਸੇ ਦੇ ਇਤਬਾਰੇ ਨਹੀਂ ਕਰਦੇ ਪਰ ਉਹਦਾ ਹੀ ਨਹੀਂ ਕਰਦਾ ਕਰਦਾਂ ਇੱਕ ਨੀ ਬੜਾ ਹਉਫਾਈ ਜੇਕਰ ਉਹ ਮੈਟਨ ਦਾ ਲੰਗਾ ਵੇਤਰਾ ਨਾ ਮਾਦ ਦੇ ਕੋਈ ਉਹਨੂੰ ਪਰੋਸਾਈ ਨਹੀਂ ਵੀ ਕਾਲ ਕਰ ਤੁਮ ਜਾਣ ਆਜਾ ਕਾਲ ਦੋ ਦੱਸਦਾ ਜਿਹਨਾਂ ਕੌਣ ਦੱਸਦਾ ਉਹ ਕਰਦਾ ਤੇ ਕਾਲ ਸਮਝਦਾ ਆਪਣਾ ਅੱਖਾਂ ਇਹ ਪਿਛਲੇ ਪਾਸੇ ਨਹੀਂ ਗਈ ਹੈ ਉੱਥੇ ਕਾਲ ਸਭ ਦਾ ਵੀ ਇੱਥੇ ਬਾਰ ਹੋਣਾ ਮੇਰਾ ਗਰਦੂ ਦੇ ਉੱਤੇ ਲੱਗਿਆ ਕਾਉ ਸੰਤ ਕੇ ਕਾਗਿ ਜੋ ਲੱਗਿਆ ਆ ਦਾ ਜੀਵਨ ਹੁੰਦਾ ਪਹ ਇਹਦਾ ਜੀਵਨ ਜਦੋਂ ਜਨਾ ਕੌਣ ਨਹੀਂ ਹੁੰਦਾ ਉਹਦੀ ਉਮਰ ਵੀ ਲੰਬੀ ਹੁੰਦੀ ਆ ਜਿਉਂਦਾ ਵੀ ਬਹੁਤ ਔਖਾ ਹੋ ਹਰ ਵਕਤ ਆ ਕਰੀ ਜਾ ਇੱਕ ਤਾਂ ਵੱਧਦਾ ਹੀ ਉਹ ਦਰਦ ਨਹੀਂ ਰੁਕਦਾ ਹਾਂਜੀ ਸੰਤ ਕੇ ਦੁੱਖਨ ਸਰਪ ਜੋਨ ਪਾਏ ਸਤ ਕੇ ਦੁੱਖਨ ਤ੍ਰਿੰਗਤ ਜੋਨ ਪਾਏ ਸਰਪ ਜੋਨ ਦੀ ਜੋਨ ਸਰਪ ਦੀ ਜੋਨ ਬਣ ਜਾਂਦੀ ਹੈ ਕਿਉਂ ਕੇ ਦੁੱਖਨ ਦਾ ਵਿਸ਼ਵਾਸ ਨਹੀਂ ਕੋਈ ਕਰਦਾ ਸੱਪੇ ਦੁਤ ਫਲਾਈ ਮਹੂਰੂ ਗੁਰੂ ਦਾ ਰਾਮ ਨੇ ਤਾਂ ਤੈਨੂੰ ਕੀ ਸਿਖਾਇਆ ਸੀ ਅੰਤਰਾਤਮਾ ਦੀ ਆਵਾਜ਼ ਤਾਂ ਤੈਨੂੰ ਸਿਖਿਆ ਦੇਣ ਵਾਲੀ ਹੈ ਤੂੰ ਉਹਦਾ ਹੀ ਵਿਰੋਧ ਕਰਨਾ ਕਿਉਂ ਤੈਨੂੰ ਦੁੱਧ ਪਿਲਾਇਆ ਥਾ ਤੂੰ ਬਿਖੂ ਦਾ ਪ੍ਰਚਾਰ ਕਰਦਾ ਆਜਾ ਦਾ ਪ੍ਰਚਾਰ ਕਰਦਾ ਤੂੰ ਤਾਂ ਗੁਰਮਾਤਾ ਦਾ ਪ੍ਰਚਾਰ ਕਰਨਾ ਸੀ ਰਾਮ ਦਾ ਬੋਲਦਾ ਹੈ ਰਾਮ ਦਾ ਦੁੱਧ ਪਿਲਾਉਦਾ ਅੰਤਰਾਦਮਨੀ ਹੋਇ ਉਹ ਛੱਡ ਕੇ ਤੂੰ ਵਾਇਦੇ ਗਲ ਕਰਦਾ ਲੋਬ ਲੈ ਕੇ ਫਸ ਗਿਆ ਜਾ ਕੇ ਉਹ ਲੋਬ ਲੈ ਕੇ ਫਸ ਗਿਆ ਸਰਪ ਜੋ ਦੁਨੀਆਂ ਲੋਬ ਕੇ ਦੁੱਖ ਨੂੰ ਸਰਪ ਜੋਨ ਪਾਏ ਸਰਪ ਜੋਨ ਪਾਏ ਸੱਤੂ ਜੋਨ ਦੀ ਪੈ ਜਾਣ ਸੱਤੂ ਜੋਨ ਆਹੋ ਸੰਤ ਕੇ ਦੁੱਖ ਨੂੰ ਤ੍ਰਿਗਤ ਜੋਨ ਕਰਮਾਏ ਕੇ ਦੁੱਖ ਨੂੰ ਤ੍ਰਿਗਤ ਜੋਨ ਕਰਮਾਏ ਅਜੇ ਕਰਮਾਏ ਛੋਟਾ ਛੋਟਾ ਇਹ ਜਿਹੜੀਆਂ ਮੱਟੀਆਂ ਨਾਲੇ ਜੋਕ ਹੈ। ਔਰ ਜਿਹੜੀ ਹੈ ਮੱਛੀ ਹੈ। ਇਹ ਥੋੜੇ ਗਿਗਲੋਏ ਨੇ। ਜਿਵੇਂ ਕਿ ਉਹ ਆਹ ਧੱਤੀ ਤੇ ਚੱਲਣ ਵਾਲੇ ਨੇ ਜਾਨਵਰ ਜਿਹਦਾ ਪੇਟ ਘਸੜਦਾ ਧੱਪੀ ਨਾਲ ਇਹ ਜੁੰਦਾਂ ਦੇ ਵਿੱਚ ਬੈਹ ਜਾਂਦਾ ਪਤਾ ਨਹੀਂ ਕਿੰਨੀਆਂ ਵੀ ਨੇ ਵੀ ਪਿਆ ਆ ਰਿਹਾ ਭਾਈ। ਸਿਰਫ ਮਝੂਲ ਜੇ ਕਰਮਾ ਕਿਹੜੇ ਮੁੰਡੇ ਜਿਹੜੇ ਜਗਮਾ ਚ ਕਰ ਮੌਂਤਾ ਨੇ ਉਹ ਵੀ ਤਰਜੂ ਹਨ ਜਗਮਾ ਨਹੀਂ ਆਪਣੇ ਆਪੇ ਕਰੇ ਕਿਹੜੇ ਮੁੰਡੇ ਚ ਤੇ ਕੋ ਜੁਨਾ ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਨਾ ਕਰਦੇ ਰਹੇ ਨੇ ਪਿੱਛੇ ਉਹ ਕਿਹਾ ਜੁਨਾ ਜਰਦਾ ਨਾ ਪੁੱਛ ਲੋਗੇ ਉਹਨਾਂ ਨੂੰ ਫੋਨ ਫੋਨ ਕਰਕੇ ਕਿਹੜੀ ਜਗ੍ਹਾ ਦੇ ਪਿੱਛੇ ਇਹ ਨਾਂ ਨੂੰ ਜੂਰ ਮਰ ਜਾਣੀਆਂ ਹੈ ਜਿਹੜੇ ਹੁਣ ਵਿਰੋਧ ਕਰਦੇ ਸੋਣਾ ਮਰ ਜਾਣੀਆਂ ਉਹ ਜੋ ਨਾ ਕਿੱਥੋਂ ਆਉਂਦੇ ਨੇ ਇਹ ਵੀ ਦੱਸ ਦੇਣ ਕਿ ਉਹ ਕਿੱਥੋਂ ਆਉਂਦੇ ਨੇ ਗੁਰਬਾਣੀ ਦਾ ਦੱਸ ਦਈਏ ਤੇ ਤਾਂ ਇਹ ਤੇ ਵਿਸ਼ਵਾਸ ਨਹੀਂ ਕਰਦੇ ਸਤਿ ਜੇ ਵਿਸ਼ਵਾਸ ਕਰਦੇ ਨੇ ਕਿੱਥੋਂ ਆਏ ਇਹ ਥੋਕ ਚ ਤੁਸੀਂ ਉਹ ਜਿਹੜੇ ਥੋਕ ਚ ਗੁਰਮਤਿ ਨਾਮ ਨਾਲੇ ਗੁਰਮਤਿ ਦਾ ਵਿਰੋਧ ਕਰਨ ਵਾਲੇ ਥੋਕੀ ਥੋਕ ਕੇ ਕਰਮ ਨੇ ਤੁਸੀਂ ਮੁੜ ਕੇ ਉਧਰੇ ਚਲੇ ਜਾਂਦੇ ਹੋ ਕੋਈ ਬੱਲਾ ਜਾਂਦਾ ਰੂਹ ਪਾਸੇ ਤਾਂ ਮਾਕੀ ਥੋਗਦਾ ਕੋਈ ਥੋਗਦਾ ਹੋਊ ਉਧਰ ਥੋਗਦਾ ਥੋਗਦਾ ਹਰ ਵਾਰ ਪੂਰਾ ਪੂਰਾ ਜਨ ਪੂਰ ਹੁੰਦਾ ਨਾ ਜਨਮ ਲੈ ਕੇ ਪੂਤਾ ਪੂੜ ਡੋਬੀ ਵੀ ਜਾਂਦਾ ਕੂੜ ਕੂੜ ਡੋਬੇ ਪੂਰ ਨਾਨਕ ਮਖਾਣੇ ਬਣਤੀ ਤੂੰ ਦਬਾਜ ਕੂੜ ਇਹ ਕੂੜੇਲੇ ਡੋਬਦਾ ਪੂਰਾ ਦੇ ਪੂਰਾ ਉਹੀ ਜਨਮ ਲੈ ਰਹੇ ਨੇ ਤੇ ਗੋਪਾਂ ਦੇ ਵਿੱਚ ਆਹੇ ਸੰਤ ਕੇ ਦੁਖਨ ਕ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੁਛ ਛਲੇ ਸੰਤ ਕੇ ਮੈਂ ਜਲੇ ਜਿਹੜੇ ਸੰਤ ਨੂੰ ਦੁਖੀ ਕਰਦੇ ਨੇ ਉਹ ਨਾਲੇ ਦੁਖ ਤ੍ਰਿਸ਼ਨਾ ਆ ਜਾ ਬੀਅਾ ਪਿਛਾ ਆ ਮਾਇਆ ਜਿਦਾ ਮਾਇਆ ਦੀਆਂ ਗੱਲਾਂ ਜੇ ਸ਼ਬਦ ਵਿਚਾਰ ਨਹੀਂ ਕੀਤਾ ਤਾਂ ਮਾਇਆ ਵਿਛੇੜਿਆ ਜੇ ਮਾਇਆ ਦੇ ਦੌਰ ਚ ਰਿਹਾ ਤਾਂ ਤ੍ਰਿਸ਼ਨਾ ਰਹੀ ਜੀ ਤ੍ਰਿਸ਼ਾ ਦੇ ਰਣਾਤ ਸਭ ਤੋਂ ਦੁੱਖ ਮਗਰਾ ਸੰਤ ਕੇ ਦੁੱਖ ਸਭ ਤੋਂ ਸੁਖ ਸੁਖੀ ਨਹੀਂ ਰਹਾ ਸਭ ਕੋ ਸੁਖ ਨੇ ਦੇ ਅੰਦਰ ਜਿਆਦਾ ਚਿੰਤਾ ਰਹਿੰਦੀ ਹੈ ਉਹ ਆਣ ਕੇ ਸਾਚੇ ਰਹਿਣੋ ਸਰ ਤੋਂ ਦੁੱਖੇ ਰੋ। ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕਿੱਥਾ ਜਾ ਰਿਹਾ। ਇਹ ਦੁੱਖ ਕੀ ਹੁੰਦਾ ਹੈ। ਬਾਹਰ ਨਹੀਂ ਦਿੱਤਾ ਕਿ ਸਾਨੂੰ ਸੰਤ ਤੋਂ ਮੁਕਤ ਹੋਣਾ। ਫਿਰ ਆਪਰੇ ਅੰਦਰਲੇ ਸਾਥ ਨਾਲ ਦੁੱਖ ਦਿੱਤਾ ਹੋਣਾ। ਅੰਦਰ ਆਦਮੀ ਦੁਖੀ ਕਰਕੇ ਬਾਹਰ ਦਾ ਸੰਤ ਦੁਖ ਨਹੀਂ ਕਿਹਾ ਤਾਂ ਮੇਰੇ ਸਮਝ ਨਹੀਂ ਲੱਗਦਾ ਨੂੰ ਬੋਝ ਨਹੀਂ ਵਾਲਾ ਦੇ ਮਿਲ ਬਸਰੇ। ਜਿਹੜਾ ਸੰਤ ਹੈ। ਚੋੜੇ ਉਹਨੂੰ ਦਾ ਸੂਤ ਬੰਦੀ ਬੈਠੇ ਨੇ ਜਿਹੜਾ ਅਸਲੀ ਸੰਤ ਉਹਦੀ ਪਛਾਣ ਕੋਈ ਨਹੀਂ ਇਹ ਹੀ ਸੰਤ ਇਸੇ ਗੱਲ ਦਾ ਸੰਤ ਨੂੰ ਧੋਖਾ ਹੈ ਇਹ ਹੀ ਸੰਤ ਨਹੀਂ ਜਿਹੜੇ ਸੰਤ ਨੰਦਿਆ ਕੀ ਹੈ ਡੁਪਲੀਕੇਟ ਸੰਤ ਤੇ ਪ੍ਰਚਾਰ ਦੇਣਾ ਸੰਤ ਇਹ ਗੱਲ ਦਾ ਧੋਖਾ ਹੈ ਇਹ ਗੱਲ ਦਾ ਧੋਖਾ ਪਰਮੇਸ਼ਰ ਨੂੰ ਹੈ ਸੰਤ ਨੂੰ ਸ਼ਾਂਤਤਾ ਪਰਮੇਸ਼ਰਿਆ ਇੱਕ ਪਹਿਲਾ ਸੰਤ ਦਾ ਹੋਈ ਹੈ ਉਹਨੇ ਕਿਸੇ ਨੂੰ ਸ਼ਾਂਤੀ ਦਿੱਲੀ ਉਹਦਾ ਆਪੇ ਨੂੰ ਹੋਈ ਹੈ ਡੁਪਲੀਕੇਟ ਦਰਾਂ ਨੇ ਸੰਤ ਬਣਾਤੇ ਜਿਹੜਾ ਸਾਰਾ ਸਿਸਟਮ ਬਣਾਇਆ ਪਰਮੇਸ਼ਰ ਜੀ ਲੋਕਾਂ ਰੂਪ ਇਹ ਆਪਣੇ ਜਾਗ ਦੇ ਘਰ ਨੂੰ ਆ ਜੋ ਉਹ ਸਾਰਾ ਇਥੇ ਸੰਤ ਕਰ ਰਹੇ ਨੇ ਮੇਰੇ ਬਾਅਦ ਨੂੰ ਫਿਰ ਕੌਣ ਕਰ ਰਿਹਾ ਪਰ ਮੈਂ ਸਦਾ ਕੀਤੇ ਕਤਰੀ ਦੇ ਵਿੱਚ ਫੇਲ ਕਰਨ ਵਾਲੇ ਸਾਰੇ ਹੀ ਨਹੀਂ ਰਲ ਕੇ ਜਿੰਨੀਆਂ ਬੱਚਾਂ ਨੇ ਸਾਰੀਆਂ ਉਹ ਫੇਲ ਕਰ ਰਹੀਆਂ ਨੇ ਕੋਈ ਸਾਦ ਮੇ ਫੇਲ ਨਹੀਂ ਵੀ ਕਰ ਰਹੇ ਜਿੰਨਾ ਗਿਆਨ ਦੇ ਦਿੰਦੇ ਨੇ ਦੇ ਦਿੰਦੇ ਨੇ ਜਦੋਂ ਲੈ ਲੰਦੇ ਨੇ ਚੱਲ ਜਾਂਦੇ ਨੇ ਪਰ ਉਹ ਇੰਨਾ ਜੈ ਮੈਨੇ ਜਾ ਪੂਰਾ ਗਿਆਨ ਹੈ ਨਹੀਂ ਆਪਣੇ ਆਪ ਨੂੰ ਪੂਰਾ ਗਿਆਨ ਮੰਨਦੇ ਨੇ ਇਹ ਅਪਰਾਧ ਇਹਨਾਂ ਦਾ ਅਪਰਾਧ ਕਰਦੀ ਉਹਨਾਂ ਦੀ ਉਹ ਇਹ ਨਹੀਂ ਮੰਦੇ ਸਤੋਂ ਵਾਹ ਕੁਛ ਹੈ ਜਦ ਕੋ ਸੈਟੀਸਫਾਈਡ ਹੈ ਨਹੀਂ ਉਹਨਾਂ ਨੇ ਅੱਲਾਹ ਨੂੰ ਖੁਦਾ ਨੂੰ ਜਾਣਿਆ ਨਹੀਂ ਆਪਣੇ ਘਰੋਂ ਸੈਟੀਸਫਾਈਡ ਨਹੀਂ ਦੂਏ ਦਾ ਤਰਫ ਕਹਿੰਦੇ ਸੁਣ ਦੇਣਾ ਨਹੀਂ ਨਾ ਸੁਣੋ ਸਾਰੇ ਸੁਣਨੇ ਚਾਹੀਦੇ ਨੇ ਇੱਕ ਥਾਂ ਬੈਠ ਕੇ ਸਾਰੇ ਵਿਚਾਰਨੇ ਚਾਹੀਦੇ ਨੇ ਜੋ ਗੱਲ ਝੇਕਾ ਮੰਨ ਲਈ ਜਾਈਏ ਇਹ ਚੌਕਾ ਨਾਲ ਦੁਆ ਨੀ ਸੁਣਨਾ ਜਿਹੜੀ ਸੁਣ ਜੋ ਗੱਲ ਹੈ ਉਹਨੂੰ ਸੁਣਾਓ ਜਿਹੜੀ ਸੁਣ ਜੋ ਨਹੀਂ ਉਹਨੂੰ ਕੱਢ ਦਿਓ ਉਹਨੂੰ ਸਾਰੇ ਸਾਰੇ ਜਦ ਇਕੱਠੇ ਹੋਣਗੇ ਫਿਰ ਪਤਾ ਲੱਗੂ ਸੁਣ ਕਿਹੜੀ ਹੈ ਨਾ ਸੁਣ ਕਿਹੜੀ ਹੈ ਹਾਂਜੀ ਨਹੀਂ ਤਾਂ ਆਪਣੇ ਆਪਣੇ ਧਰਮ ਦੀਆਂ ਸਾਰੀਆਂ ਗੱਲਾਂ ਸੁਣ ਜੋ ਉਹ ਵੀ ਵੀ ਸੁਣ ਰਿਓ ਬੰਦੀ ਹੋ ਫਾਈ ਗੁਰਦਆਰਿਆਂ 1200 ਡਝੋਗੇ ਜੀ ਹੋਰ ਕੋਈ ਬਸਿਆਂਿਆਂ ਅਸਰ ਜੋ ਉਹਦਾ ਗੁਰਮਤ ਤੋਂ ਖਲਾਫ ਨੇ ਉਹ ਸਾਥੀਆਂ ਜਿਹੜੀਆਂ ਨੇ ਗੁਰਬਾਲ ਸਾਹਿਬੀ ਉਹ ਛੇਵੀ ਉਹ ਥੋੜ ਡਝੋਗੇ ਜੀ ਜੇਕਰ ਬੁੱਝ ਲਿਆ ਉਹ ਤਾਂ ਸੁਣ ਯੋਗੇ ਦੀ ਗੱਲਾਂ ਜਿੰਨੇ ਸੁਣਨਾ ਗੁਰਮਤਾਈ ਵਿਰੋਧ ਕਰ ਲੈਗੇ ਜੀ ਤੁੱਖ ਫੱਢਣੀ ਬੈਰੀ ਦੀ ਸਾਖੀ ਘੋੜੇ ਨਾਲ ਸਤ ਸੁਭ ਚੱਕਿਆ ਸਭ ਇਹ ਕਹਦਾ ਸਾਡਾ ਬਣ ਗਿਆ ਸਾਖੀਆਂ ਇਹ ਸੋਲਿ ਜੋਗ ਨੇ ਤੇ ਸੁਣਿ ਜੋਗ ਇਹ ਕਲਾ ਸੁਣਦੇ ਬੁਰਾ ਜੇ ਸਰਦਾਰ ਅਖਦੇ ਦੂਜੇ ਨੂੰ ਵੰਦਾ ਤੇ ਦੂਜੇ ਤਰ ਮਾਰੇ ਪੱਕਾ ਕੁਮਾਤਾ ਗੁਰਨਾਣ ਕਰ ਲਓ ਜੀ ਇਹ ਸੁਣ ਇੱਕ ਇਹ ਸੁਣ ਗੱਲ ਹੈ ਦੇਖੋ ਸਮਾਨਾ ਸੋਣਿ ਨਹੀਂ ਹੈ ਸਾਡੇ भी ਸੋਨ क्यों ਇੱਥੋਂ ਕਾਜੇ ਕਮਾਤਾ ਫਿਰ हो गया पहला ਪਹਿਲਾਂ ਕੋ ਭੀ ਨਹੀਂ ਸਕਦਾ ਕਿਉਂ ਕਹੀਦਾ ਗੁਰਬਾਨੀ ਦਾ ਜਿਹੜੀ ਕਿਤੇ ਕੋ ਨਾਨਕਾ ਜਿਹੜਾ ਤੇ ਸਭੇ ਝੂੜ ਦੇ ਪਿੰਡ ਦੇ ਚਾਰ ਕਿਤੇ ਲੋਕਾਂ ਇਹ ਕਾ ਅ ਭੇੜ ਪਾਉਣ ਨੂੰ ਨਾ ਦੁਸ਼ਮਣੀ ਪਾਉਣ ਨੂੰ ਇਹਨਾਂ ਮੱਤਾ ਦੀ ਆਪ ਸੀ ऐसे इकट्ठे मिलते भी इकट्ठे ही ना हो गए तो समझो करण आवे ही ना हां इकट्ठे बैठ के विचारन दी नौबत ही ना ऐसे इकट्ठे बीच में तो ये डिवाइडर होगा हां एडवाइडर नून सी बुल भी है ओ लोग नहीं भूलण गए जवाब कह रहे हैं ਇਹ ਗੱਲ ਤੇ ਕੋਈ ਆਉਂਦਾ ਹੀ ਨਹੀਂ ਜਵਾਬ ਦੇ ਦਿੰਦਾ ਚੁੱਪੇ ਕਰ ਜਾਂਦੇ ਸਾਰੇ ਤੇ ਮੁਕਤੀ ਦੇ ਸਭ ਧਰਮ ਸਮੇਲਨ ਕਰਨ ਲੱਗੇ ਹਾਂ ਮੁਕਤੀ ਦੇ ਕਰਦੇ ਫੁਰਕੀ ਨੇ ਉਥੇ ਧਰਮ ਕਿਹੜਾ ਇੱਕ ਵੀ ਆਦਮੀ ਦਾ ਰੂਪ ਹੀ ਉੱਤੇ ਤੇ ਸਾਰੇ ਸਭ ਧਰਮ ਸਮੇਲਨ ਕਰਦੇ ਨੇ ਸਭ ਧਰਮ ਦੀ ਮੁਕਤੀ ਧਰਮ ਇੱਕ ਹੈ ਸਭ ਧਰਮ ਕਿਥੋਂ ਧਰਮ ਤਾਂ ਇੱਕ ਹੈ ਜੇ ਸੁਪੈਲਾ ਨਾ ਸਾਰੇ ਤੁਹਾਨੂੰ ਮਿਲ ਜਾਣਗੇ ਜੇ ਮਿਲ ਅਧਰੈ ਦੀ ਕੋਈ ਸਮੇਲਨ ਕਦਾ ਹੋ ਗਿਆ ਸਾਰੇ ਸਾਰਿਆਂ ਨੂੰ ਮਿਲ ਜਾ ਸਮੇਲਨ ਦਾ ਮੈਂ ਮਲਾ ਕੇ ਦਿਖਾਉਂ ਗਿਰਤੇ ਕਿਉਂ ਨਹੀਂ ਫਿਰ ਸਮੇਲਨ ਕਦਾ ਹੋ ਗਿਆ ਫਰੋਡ ਕਰਦੇ ਨੇ ਫਰੋਡ ਫਰੋਡਿਆਂ ਬੁਲਾ ਲੈਂਦੇ ਨੇ ਉਸ ਸਮੇਲਨ ਨਾਲ ਵਾਲੇ ਬੱਦੇ ਹੀ ਨਹੀਂ ਕੋਈ ਬਰੋਸਾ ਨਹੀਂ ਹੱਸਿਆਤੀ ਦੁਸਾਰੀ ਨਾਲ ਗਿਆ ਨਾ ਵੀ ਤਰਬ ਤਰਬਦਾ ਹੀ ਨਹੀਂ ਆਉਣਾ ਗਿਆ ਤਾਂ ਰੁਕੀ ਹੁੰਦਾ ਹਾਂ ਸੰਤ ਦੇ ਦੁੱਖਾਂ ਨੂੰ ਤ੍ਰਿਸ਼ਨਾ ਵਿੱਚ ਜਲਣ ਸੰਤ ਦੇ ਦੁੱਖ ਨੂੰ ਤ੍ਰਿਸ਼ਨਾ ਵਿੱਚ ਜਲਣ ਸੰਤ ਦੇ ਦੁੱਖ ਨੂੰ ਸਭ ਜਿਹੜੇ ਲੋਕ ਸੰਤਾਂ ਨੂੰ ਦੁੱਖ ਦੇਣ ਵਾਲਿਆਂ ਤ੍ਰਿਸ਼ਨਾ ਦੇ ਅੱਗੇ ਜਲਦੇ ਰਹਿੰਦੇ ਮਾਇਆ ਪਿੱਛੇ ਸੰਤ ਨੂੰ ਦੁੱਖ ਕਰੂ ਸੰਤ ਦਾ ਕਾਇਨਾ ਮਾਇਆ ਪਿੱਛੇ ਨਾ ਵਜੋ ਉਹ ਮਾਇਆ ਪਿੱਛੇ ਪੈਦਾ ਆਏ ਤੇ ਗਲਤ ਸੰਤ ਨੂੰ ਦੁੱਖ ਹਾਂ ਸੰਤ ਦੇ ਦੁੱਖ ਸਭ ਕੁਝ ਛਲੇ ਫਿਰ ਛੱਡ ਸੰਤ ਦੇ ਦੁੱਖ ਸਭ ਕੁਝ ਛਲੇ ਸਾਰੇ ਆਲਸ ਛੜ ਕੱਪੜ ਕਰਦੇ ਸੜ ਕੱਪੜ ਜਿਹੜਾ ਹੈ ਸੰਤ ਨੂੰ ਦੁੱਖ ਦੇਣ ਵਾਲੀ ਚੀਜ਼ ਸਾਰੇ ਆਦਮੀ ਕਰ ਲੈਂਦਾ ਝੂਠ ਬੋਲ ਲੈਂਦਾ ਝੂਠ ਬੋਲ ਕੇ ਕੋਈ ਛੱਡੀ ਮਾਰ ਲੈਂਦਾ ਲੇਕਿਨ ਅਬਦੁੱਲਾ ਕਦੇ ਤੇ ਅਜਾ ਕੁਝ ਹੋਇਆ ਅੰਤਲਾ ਜਿਹੜਾ ਛੱਡੇ ਮਾੜਦਾ ਵੀ ਅੰਤਲਾ ਉਹ ਵੀ ਖੁਸ਼ ਹੁੰਦਾ ਜੇ ਸੜਕਾ ਆਪਣਾ ਆਇਆ ਲੈ ਤੇ ਅੰਤਲਾ ਨਹੀਂ ਕੋਈ ਜ਼ੁਰਤ ਉਹਨੂੰ ਪਤਾ ਬਿਮਾੜਾ ਕੰਮ ਕੀਤਾ ਉਹ ਤਾਂ ਬੰਨੀ ਮਾੜਾ ਕੰਮ ਕਰਕੇ ਤਾਂ ਕੋਈ ਸਦੇ ਖੁਸ਼ ਹੋਇਆ ਹੀ ਨਹੀਂ ਅਜੇ ਤੱਕ ਸੇ ਡਾਕੂ ਡਾਕਾ ਮਾਰਦੇ ਵੀ ਖੁਸ਼ ਹੋ ਗਏ ਤਬ ਅੰਦਲ ਉਹ ਤੇ ਖੁਸ਼ ਹੁੰਦਾ ਜਿੰਨੀ ਖੁਸ਼ ਹੁੰਦਾ ਅਸਲੀ ਗਹਿਰਾਈ ਨੀ ਕੋਈ ਫੋਸ਼ਲ ਅੰਦਰ ਬੈਠਾ ਉਹ ਨਹੀਂ ਕੋਈ ਉਹਦਾ ਫਿਰ ਥੋੜੀ ਜਿਹੀ ਖੁਸ਼ੀ ਨਹੀਂ ਰਾਹ ਤਾਂ ਮਹਿਸੂਸ ਕਰਦਾ ਇਹ ਜੋ ਦੰਗਰਦੀ ਹੈ ਕੋਸੋਂ ਫਿਰ ਆਪਕੋ ਤਾਂ ਕਿ ਉਹ ਜਿਹੜੀ ਜਿਆਦਾ ਅੰਦਰ ਦੁੱਖ ਹੋਇਆ ਹੋਇਆ ਉਹ ਥੋੜਾ ਘਟ ਜਵੇ ਗੀੜਾ ਅਸਲੀ ਕੁਈੜਾ ਸਤਾਰੇ ਕਰਦੇ ਲੋਕ ਵੀ ਇਹ ਚੰਗਾ ਕਰਨ ਚੰਗਾ ਆਦਮੀ ਹਾਂਜੀ ਸੰਤ ਕੇ ਦੁੱਖੰ ਤੇਜ ਸਭ ਜਾਏ। ਸਾਧਕ ਦੇ ਉਗਣ ਤੇਜ ਸਭ ਜਾਏ। ਸੰਤ ਨੂੰ ਦੁੱਖ ਗਿਆਨ ਕਰਕੇ ਇਹ ਜਿਹੜਾ ਹੈਗਾ ਸਾਰਾ ਕਸ਼ਟ ਹੋ ਜਾਂਦਾ। ਜੋ ਤਪ ਤੇਜ ਹੈ। ਤੇਜ ਕੀ ਹੈ? ਬੁੱਧੀ ਇੰਦੀ ਇੰਦੀ ਹੈ। ਬੁੱਧੀ ਦਾ ਜਿਹੜਾ ਤੇਜ ਹੈ। ਤੇਜ ਬੁੱਧੀ ਜਿਹੜੀ ਬੰਦ ਬੁੱਧੀ ਹੋ ਜਾਂਦੀ। ਬੁੱਧੀ ਬੁੱਧੀ ਦਾ ਜਿਹੜਾ ਸ਼ਕਤੀ ਹੈ ਉਹ ਨਸ਼ ਹੋ ਜਾਂਦੀ ਹੈ। ਉਹ ਬਲ ਘਟ ਜਾਂਦਾ। ਤੇ ਸਭ ਜਾਏ। संत के दुख नु नीचे नु जाय संत रे तो बढ़ डी नीचे दी चाए दी चाहा भी नीचे बन जाता जिस चा हुवा तो या बन गी नीचे दी चाए दी चाहा तो भी नीचे चला जाता संत दुखी का ठां है संत दुखी का ठां था को ना है संत नु दुख देन वास्ते ਕੋਈ ਜਗ੍ਹਾ ਨਹੀਂ ਹੈ ਕਿਤੇ ਵੀ ਨਾ ਐਸ ਲੋਕ ਜਿਹਨੂੰ ਬੰਦ ਲੋਕ ਉਹ ਲੋਕ ਤਾਂ ਵੀ ਉਹ ਜਿੱਥੇ ਵੀ ਹੈਗੇ ਹੋਂ ਦਾ ਮਤਲਬ ਇਹ ਵੀ ਟਿਕਾਓ ਕੋਈ ਨਹੀਂ ਉਹਨੂੰ ਇਹ ਚਾਹੁੰਦਾ ਸੰਸ ਤੇ ਦੋਖੀ ਨੂੰ ਵੀ ਵੇੜਾ ਇਹ ਮੁੰਡਾ ਬਣ ਜਾਵੇ ਸਾਡੇ ਖੰਸਾਨ ਚਾਜਦੇ ਹੁਣ ਕੋਈ ਖੁਸ਼ ਹੋ ਕੇ ਕਹਿੰਦਾ ਮੇਰੇ ਘਰੇ ਜਨਮ ਨਾਲੋਂ ਆਪ ਨੇ ਦੀ ਮੇਰਾ ਮੁੰਡਾ ਆਇਆ ਹੋਵੇ ਜਨਮ ਮੈਂ ਦੇਦਾ ਹਾਂ ਇਹ ਕਰਕੇ ਵੀ ਜਾਨਵਰਾਂ ਜਾਂਦਾ ਪਹਿਲਾਂ ਜਾਨਵਰਾਂ ਨੇ ਕਹਿੰਦਾ ਅੱਜ ਨਹੀਂ ਤੂੰ ਜੰਪ ਰਾਨਾ ਫਿਰ ਰੋੜਾਈ ਦੀ ਉਹਨਾਂ ਸੰਤਾਂ ਤੋਂ ਕੀ ਅਪਦਾਈ ਕੋਈ ਉੱਥੋਂ ਹੁੰਦਾ ਫਿਰ ਉਤਰ ਉਤਰੇ ਵੀ ਜੋਂ ਤਾਹੀਆਂ ਕਰਮਾਏ ਜੇ ਜੋ ਨੋਬੂ ਚਕੇ ਆ। ਆਦਮੀ ਜੋ ਕੋਈ ਚਲਦੀ ਮਾਂ। ਆਦਮੀ ਜੋ ਦੇਰ ਨੂੰ ਆਨੇ ਕੋ ਜਲਦੀ ਹੋਵੇ। ਉਹ ਕਦੀ ਜੇ ਇਨਾ ਬਲੇਮ ਹੈ। ਮੈਂ ਨਹੀਂ ਨਾਨਕ ਸੰਤ ਭਾਵੇਂ ਦਾ ਉਹ ਵੀ ਗੱਦੀ ਪਾਇ। ਨਾਨਕ ਸੰਤ ਭਾਵੇਂ ਤਾਂ ਉਹ ਵੀ ਦਰ ਪਾਇ। ਪਰ ਜੇ ਸੰਤ ਭਾਵੇਂ ਉਹ ਦੇ ਬਲ ਬੁੱਧ ਦੇ ਲੈਵਲ ਤੇ ਆ ਕੇ ਅਸੀਂ ਸੰਸਾਰ ਨੂੰ ਦੁੱਖ ਦਿੱਤੀ ਹੈ ਬੁੱਧ ਦੇ ਲੈਵਲ ਤੇ ਆ ਕੇ ਸੰਸਾਰ ਨੂੰ ਹਥਿਆਰ ਚੱਕ ਲਵੇ ਵੀ ਦਾਨ ਕਰਕੇ ਦਿਖਾਏ ਤਾਂ ਵੀ ਛੇ ਰੂਪੋਂ ਜਿਹੜੇ ਬੰਦ ਹੋਏ ਕਰ ਲਵੇ ਅੰਦਰਲਾ ਸੰਤ ਵੀ ਬਹੁਤ ਅਪਰਾਧ ਕਰ ਚੁੱਕੇ ਅਸੀਂ ਐਸਾ ਨਹੀਂ ਕਰਨਾ ਫਿਰ ਕਦੇ ਫੇਰ ਉਹ ਪੋਜ਼ਿਟਿਵ ਵੱਲ ਉੱਤਰ ਜਾਣਾ ਹੈ ਸਦਾ ਜਦੋਂ ਇਹ ਹੋਂਦ ਨਹੀਂ ਠੱਲੇ ਛੱਲੇ ਜਾਏਗਾ। پیچھے ਤੇ ਚਾਏ پیچھے-ਪਿਛੇ ਜਾਇਆ ਤਾਂ ਜਿੰਨਾ ਜ਼ਰੂਰ ਉੱਤਰ ਆਤਮੂਰ। ਫੈਲਾਣਾ ਗਲਬੇ ਵਿੱਚ ਹੁਲਦੀ ਜਾਣਾ ਹੈ ਤੁਹਾਨੂੰ। ਉਹਨੇ ਕੰਮ ਕਰਨਾ ਹੀ ਨਹੀਂ। ਫੇਰ ਉੱਤਰਉਣਾ ਹੈ। ਫੇਰ ਕੀ ਹੋਵੇਗਾ?